श्लोक महला तीजा बाबीहा जिसनु तू पुकारदा तिसनु लोचै सब कोए अपनी कृपा करकै बससी वनत्रिन हरिया होई ए बाबीहा एडी हाल तू रोजदा ना बोल दनु दिन बल बूंदा काश की सदले पुकारदा की मांगदा ਤੇ ਸਾਨੂੰ ਲੋਝੇ ਸਭ ਕੋ ਉਹਨੂੰ ਸਾਰੇ ਲੋਝਦੇ ਨੇ ਕਿਉਂਕਿ ਲੋਝ ਸਾਰੇ ਉਸੇ ਨੂੰ ਲੋਝਦੇ ਨੇ ਆਪਣੀ ਕਿਰਪਾ ਕਰਕੇ ਵਸਤੀ ਉੱਪਰ ਵਰਸਦਾ ਦਾ ਆਪਣੀ ਮਰਜ਼ੀ ਨਾਲ ਉਹ ਜਿਹਦੇ ਤੇ ਕਿਰਪਾ ਹੁੰਦੀ ਹੈ ਉਹਦੇ ਤੇ ਹੀ ਵਰਸਦਾ ਹੋਰ ਦੀ ਵਰਸਦਾ ਕਿਸੇ ਤੇ ਛਾਇਆ ਬਦਲ ਸਾਰੇ ਹੀ ਰਹਿੰਦਾ ਹੈ ਵਰਸਦਾ ਉੱਥੇ ਹੀ ਹੈ ਜਿੱਥੇ ਉਹਦੀ ਮਰਜ਼ੀ ਹੁੰਦੀ ਹੈ ਸਦਾ ਸਦਾ ਸੁਖ ਹੋਏ ਜਿਹਦੇ ਮੂੰਹ ਤੇ ਪੈ ਗਈ ਬੂੰਦ ਸਦਾ ਸਦਾ ਸੁਖੀ ਹੋ ਜਾਂਦਾ ਸਦਾ ਸਦਾ ਸੁਖ ਕਰ ਦਿੰਦਾ ਜਿਹਦੇ ਮੂੰਹ ਚ ਪੈ ਜਾਂਦੀ ਏ ਬੂੰਦ ਅਕਾਸ਼ ਕੀ ਦਿਨ ਬਨ ਅਕਾਸ਼ ਕੀ ਜਿਹਦੇ ਪੈ ਜਾਂਦੀ ਮੂੰਹ ਦੇ ਵਿੱਚ ਬੂੰਦ ਪਰਤਾਂ ਦੇ ਨਦੀਜੂ ਪਾਈ ਹੈ ਵਿਰਲਾ ਬੂਝੈ ਕੋਈ ਬੈਹਂਦਿਆਂ ਧਿਆਈ ਹੈ ਸਦਾ ਸਦਾ ਸੁਖ ਹੋਈ ਗੁਰ ਪ੍ਰਸਾਦੀ ਪਾਈ ਹੈ ਇਹ ਤਾਂ ਇਹੀ ਤਾਂ ਗੁਰ ਪ੍ਰਸਾਦ ਹੈ ਉਹ ਗੁਰ ਪ੍ਰਸਾਦ ਦੇ ਫੂਲ ਦਈਆ ਹੋਰ ਗੁਰ ਪ੍ਰਸਾਦ ਕੀ ਹੈ ਗੁਰ ਪ੍ਰਸਾਦੀ ਪਾਈ ਹੈ ਬਿੰਦਾ ਬੁੱਝੇ ਕੋਈ ਕੋਈ ਬਿੰਦਾ ਬੁੱਝਦਾ ਹੈ ਗੁਰ ਪ੍ਰਸਾਦ ਗੁਰ ਪ੍ਰਸਾਦ ਤਾਂ ਹੋ ਜਾ ਕਹੀ ਜਾਂਦੇ ਆ ਗੂੜ ਦੇ ਗੁਰ ਪ੍ਰਸਾਦ ਹੈ ਪਹਿਨੇ ਔੜਦੇ ਆਂ ਨਿਤ ਧਿਆਈ ਹੈ ਪਹਿਨੇ ਔੜਦੇ ਆਂ ਨਿਤ ਧਿਆਨ ਰੱਖੀਏ ਵੀ ਗੁਰ ਪ੍ਰਸਾਦ ਚਾਹੀਦਾ ਹੈ ਸਦਾ ਸਦਾ ਸੁਖ ਹੋਵੇ ਸਦਾ ਸਦਾ ਸੁਖੀ ਹੋ ਜਾਂਦਾ ਜੇ ਬਹਿਨੇ ਉੱਠਦਾ ਧਿਆਨ ਰੱਖੇ ਜੇਦਾ ਬਹਿਨੇ ਉੱਠਦਾ ਧਿਆਨ ਰੱਖਦਾ ਉਹਨੂੰ ਮਿਲ ਵੀ ਜਾਂਦੀ ਹਾਂਜੀ ਨਾਨਕ ਅੰਮ੍ਰਿਤ ਸਦਾ ਹੀ ਵਰਸਦਾ ਦੇਵ ਹੈ ਹਰ ਨਾਨਕ ਅੰਮ੍ਰਿਤ ਸਦਾ ਹੀ ਵਰਸਦਾ ਨਾਨਕਾ ਨਾਮ ਅੰਮ੍ਰਿਤ ਸਦਾ ਸਦਾ ਹੀ ਵਰਸਦਾ ਅੰਮ੍ਰਿਤ ਉਹ ਅੰਮ੍ਰਿਤ ਕਿਹੜਾ ਜਿਹੜਾ ਸਦਾ ਵਰਸਦਾ ਇਹ ਤਿਆਰ ਕਰਦੇ ਨੇ ਵਰਤੇ ਦਾ ਸਦਾ ਵਰਸਦਾ ਛਕੜਨ ਦੀ ਛਕੜਨ ਦਾ ਆ ਹੈ ਜਿਹੜਾ ਸਦਾ ਹੀ ਵਰਸਦਾ ਉਹ ਬਬੀ ਇਹ ਬੰਦਾ ਛਕਿਆ ਜਾਣਾ ਉਹ ਬਬੀ ਹੀ ਛਕੂ ਜਿਹੜਾ ਕਿੜਿਓ ਕਰਿਓ ਕਰੂ ਉਹਦੇ ਗੂਜ ਪਊਗਾ ਸਾਰਿਆਂ ਦੇ ਨੀ ਪੈਂਦਾ ਅਪਰਤ ਸਾਡੇ ਹੀ ਵਰਸ ਦਾ ਗੁਰਮਖੀ ਦੇਵੇ ਹਰ ਸੋਏ ਗੁਰਬਖਾਨੂ ਦੰਦਾ ਹਰ ਆਪ ਉਹਨਾਂ ਦੇ ਗੂਜ ਜੋ ਆਪਣਾ ਪੰਜ ਪਿਆਰੇ ਦਿੰਨੇ ਉਹ ਪਹੁਲ ਹੈ ਤੇ ਅੰਮ੍ਰਿਤ ਇਹ ਹੈ ਜਿਹੜਾ ਆਪਾਂ ਨੂੰ ਇਹ ਸ਼ਲੋਕ ਚ ਦੱਸਿਆ ਸਰਬਾਨੀ ਦਾ ਸਭ ਕੁਝ ਦਸੀ ਜਾਂਦੀ ਆਪਾਂ ਕੋਲ ਦੇ ਨਾ ਆਪਾਂ ਦੇ ਮਿਲਦੇ ਨਾਲ ਇਹਦਾ ਸਦਾ ਹੀ ਵਰਸ ਇਨੂੰ ਤਿਆਰ ਕਰਨ ਦੀ ਲੋੜ ਨਹੀਂ ਹੈ ਆ ਪਿੰਡਾਂ ਚ ਹੋ ਕੇ ਦੇਣ ਦੀ ਕਿ ਅੱਜ ਅੰਮ੍ਰਿਤ ਸੰਚਾਰ ਹੋਏਗਾ ਹਾਂਜੀ ਆ ਲੋੜ ਤਾਂ ਹੈ ਨਹੀਂ ਵੀ ਪਰ ਉਹਨੂੰ ਦੁਆਰਦਾਰੀ ਕੰਮ ਚਲਾਉਂਦੇ ਠੀਕ ਹੈ ਗੁਰਬਾਣੀ ਜੇ ਪੜ ਲੈਂਦੇ ਤਾਂ ਫਿਰ ਸ਼ਰਮਸਾਰ ਨਾ ਹੋਣਾ ਪੈਂਦਾ ਸਭ ਕੋ ਜਾਣ ਬੁੱਝ ਕੇ ਧੀਰਕ ਦੇਵੇ ਸਹਿਜ ਸੁਭਾਈ ਕਲ ਕਲਪਨਾ ਦੀ ਮੈਲ ਕਲਪਨਾ ਦੀ ਇੱਛਾ ਜਿਹੜੀ ਹੈ ਦੀ ਇੱਛਾ ਜਦ ਹੋ ਜਾਂਦੀ ਹੈ ਹਿਰਦੇ ਵਿੱਚ ਕਲਮਲ ਮੈਦਨੀ ਕਲਮਲ ਹੋ ਜਾਂਦੀ ਹੈ ਮੈਦਨੀ ਧਰਤੀ ਦੂਜੀ ਕਹਿੰਦੇ ਮੈਦਨੀ ਹਿਰਦੇ ਨੂੰ ਕਹਿੰਦੇ ਜਮੀਨ ਹੈ ਜਿੱਥੇ ਨਾਲ ਵੇਚਣਾ ਸੀ ਉੱਥੇ ਤਾਂ ਕਲਮਲ ਹੋਈ ਪਈ ਹੈ ਮੈਦਨੀ ਮੈਦਨੀ ਅਰਦਾਸ ਕਰੇ ਲੈ ਅਰਦਾਸਾਂ ਕਰਦਾ ਲੈ ਲਾ ਕੇ ਮੈਦਨੀ ਕਲਮਲ ਹੋਈ ਹੋਈ ਹੈ ਸੱਚੇ ਸੁਣਿਆ ਕਰਨ ਦੇ ਧੀਰਕ ਦੇਵੇ ਸਹਿਸਵਾਏ ਸੱਚੇ ਨੇ ਸੁਣਿਆ ਤਦ ਦਿੱਤਾ ਹੋਈ ਕੀ ਕਹਿਣਾ ਧੀਰਕ ਦੇਵੇ ਸਹਿਸਵਾਏ ਦਾਹਾਂ ਗੁਰਬਾਣੀ ਧੀਰ ਕੇ ਦਿੰਦੀ ਐ ਇਹਨੂੰ ਸਾਫ਼ ਕਰ ਲੈ ਮੇਰੇ ਦਿਨੂੰ ਜਿੱਦੀ ਗੁਰਬਾਣੀਆਂ ਤਾਂ ਹੀ ਹਿਰਦਾ ਕਰਨ ਨੂੰ ਕਹਿੰਦੀ ਐ ਸਾਫ਼ ਕਰਨ ਨੂੰ ਕਹਿੰਦੀ ਐ ਧੀਰਕ ਦੇਵੇ ਸਹਿਸ ਪਾਏ ਗੁਰਬਾਣੀ ਨਾਲ ਤੇ ਤਾਹੀ ਤੇ ਤਨ ਹੋਈ ਹੋਈ ਐ ਮੇਰੇ ਦਿਨੂੰ ਹੋ ਨੂੰ ਫਰਮਾਇਆ ਉੱਠਾ ਸ਼ਹਿਰ ਲਾਏ ਅੰਨ ਧੰਨ ਉਪਜੈ ਬਹੁ ਕੀਮਤ ਕਹਿਣ ਨਾ ਜਾਏ ਜਿੱਦੜ ਐਨੂੰ ਫਰਮਾਨ ਹੋਆ ਇਤਨੀ ਬੁੱਧੀ ਨੂੰ ਕਹਿੰਦੇ ਨੇ ਇੰਦਰਾ ਚਿੱਤ ਐ ਕਿਸੇ ਪਰਮਗਣ ਨੂੰ ਫਰਮਾਨ ਹੋ ਗਿਆ ਫਰਮਾਨ ਹੋਆ ਲਾਏ ਉਹਨੇ ਬੜਾ ਇਹਨਾਂ ਨੂੰ ਉਪਦੇਸ਼ ਕੀਤਾ ਲੋ ਅੰਦਰ ਸਫਾਈ ਕਰੋ ਅੰਦਰ ਦੀ ਸਫਾਈ ਕਰੋ ਬਾਹਰ ਨਹੀਂ ਦਰਬਾਰ ਆ ਭਿੱਤਰ ਭਰੀ ਭੰਗਾਰ ਅੰਦਰ ਵਾਲੀ ਕਹਿੰਦੇ ਭੰਗਾਰ ਹੈ ਕੱਢਦੇ ਬਾਹਰ ਬਾਹਰੋਂ ਚਾਹੇ ਨਾਲ ਸੁਟਾਉਂਦੇ ਆ ਬਾਹਰ ਦਾ ਗੁਰਬਾਣੀ ਦਾ ਉਪਦੇਸ਼ ਦਿੱਤਾ ਕਹਿੰਦੇ ਗੱਪਲੀਆਂ ਮਾਰਦਾ ਹੈ ਅੰਨ ਧਨ ਉਪਜੈ ਬਹੁਤ ਘਣਾ ਕੀਮਤ ਕਹੇ ਨਾ ਜਾਏ ਅੰਨ ਧਨ ਉਪਜੈ ਬਹੁਤ ਘਣਾ ਬਹੁਤ سارے ਲੋਕਾਂ ਨੇ ਗੱਲ ਬੋਲੀ ਇਹਦੀ ਵੀ ਬੰਦੀ ਉਹਦੀ ਕਿਸੇ ਨੇ ਕਪੜੇ ਕਪੜੇ ਕਹਿੰਦੇ ਰਣ ਮੰਨਣ ਵਾਲੇ ਵੀ ਬਥੇਰੇ ਨੇ ਬਹੁਤ ਸਾਰੇ ਤਿਆਰ ਹੋ ਗਏ ਲੋਕ ਦੁਖੀ ਬੜੇ ਸੀ ਉਹ ਕਲਾ ਦਾ ਤਾਂ ਪੈਦਾ ਹੋਇਆ ਕੀਮਤ ਕਹਿਣ ਨਾ ਜਾਏ ਕਹਿਣ ਨਾ ਜਾਏ ਕੀ ਕੀਮਤ ਕਹਿਣੀ ਆ ਉਹਨਾਂ ਦੀ ਪੈਦਾ ਹੋਇਆ ਉਹਦੀ ਕੋਈ ਕੀਮਤ ਨਹੀਂ ਕੱਲਾ ਕੱਲਾ ਹੀਰਾ ਪੈਦਾ ਹੋ ਗਿਆ ਕੱਲਾ ਜਵਾਵ ਪੈਦਾ ਹੋ ਗਿਆ ਲਾਲ ਪੈਦਾ ਹੋ ਗਿਆ ਗੁਰੂ ਕੇ ਸੁਣ ਕੇ ਅਨ ਤਨ ਜਿਹੜਾ ਨਾਮ ਰੂਪੀ ਅੰਨ ਹੈ ਤੇ ਨਾਮ ਰੂਪੀ ਧੰਨਾ ਹੈ ਜੀ ਨਾਮ ਰੂਪੀ ਤਾ ਨਾ ਗੁਣ ਪਹਿਲਾ ਹੋ ਗਏ ਕਲ ਮੰਦੀ ਤਾ ਗੁਣ ਪਹਿਲਾ ਹੋ ਗਏ ਹੋ ਜੀ ਨਾਨਕ ਨਾਮ ਸਲਾਹ ਤੂੰ ਸਭਨਾ ਜੀਆਂ ਦੇਂਦਾ ਰਿਜਕ ਸੰਭਾਹੇ ਜਿਤ ਖਾਦਾ ਸੁਖ ਊਪਜੈ ਫਿਰ ਦੁਖ ਨ ਲੱਗੈ ਆਈ ਨਾਨਕ ਕਹਦਾ ਤੋ ਲੋਕ ਦੀ ਸਭ ਸਲਾਹ ਕਰ ਜਿਹੜਾ ਸਾਰੇ ਜੀਆਂ ਨੂੰ ਰਿਜਕ ਦਿੰਦਾ ਉਹਦੀ ਸਭ ਸਲਾਹ ਕਰ ਇਹ ਹੁ ਨਾਮ ਕਿਹੜਾ ਜੀ ਨਾਮ ਪਦਾਰਥ ਦੀ ਗੱਲ ਹੋ ਰਹੀ ਐ ਹਾਂ ਜੀ ਜਿਤ ਸੁਖ ਊਪਜੈ ਫਿਰ ਦੁੱਖ ਨਾ ਲੱਗੈ ਆਏ ਜਿਤ ਕੱਦ ਦਾ ਸੁਖ ਪਿਆ ਜਿਹਦਾ ਖਾਣ ਨਾਲ ਸੁਖ ਹੈ ਦਾ ਹੋਂਦ ਨੇ ਖਾਣ ਨਾਲ ਸੱਚ ਦੇ ਖਾਣ ਨਾਲ ਸੁਖ ਪਿਆਦਾ ਹੋਊਗਾ ਦੁੱਖ ਨਾ ਲੱਗ ਫਿਰ ਦੁੱਖ ਨਾ ਲੱਗਿਆ ਵੀ ਨਹੀਂ ਆਉਂਦਾ ਦੁੱਖ ਹੋਜੀ ਪੌੜੀ ਹਰ ਜੀਓ ਸੱਚਾ ਸੱਚ ਤੂੰ ਸੱਚੇ ਲਹਿ ਮਿਲਾਏ ਦੂਜੇ ਦੂਜੀ ਤਰਫ ਹੈ ਕੂੜ ਮਿਲੇ ਨਾ ਮਿਲਿਆ ਜਾਏ اے ਹਰ ਜੀਓ ਸੱਚ ਵੀ ਤੂੰ ਜੀਅ ਸੱਚਾ ਵੀ ਤੂੰ ਜੀ ਸੱਚੇ ਲਾਏ ਮਲਾਏ ਜਿਹੜੇ ਸੱਚੇ ਹੁੰਦੇ ਨੇ ਸਤਿਆਰੇ ਹੁੰਦੇ ਨੇ ਉਹ ਨੂੰ ਆਪਣੇ ਨਾਲ ਜੋੜ ਲੈਣੇ ਮਲਾ ਲੈਣੇ ਦੂਜੇ ਦੂਜੀ ਤਰਫਾਂ ਨੇ ਜਿਹੜੇ ਦੂਜੇ ਨੇ ਮਨਮੁਖ ਨੇ ਕੁੜਿਆਲੇ ਨੇ ਸਾਡੇ ਵਿਰੋਧੀ ਨੇ ਉਹ ਨਾ ਕੁੜੇ ਨਾਲ ਲਾ ਨੇ ਸਾਥ ਨਾਲ ਸਾਥ ਉਹਨੂੰ ਨਹੀਂ ਜਾ ਸਕਦਾ ਅਸੀਂ ਉਹਨਾਂ ਨਾਲ ਨਹੀਂ ਮਿਲਦੇ ਉਹ ਸਾਡੇ ਨਾਲ ਨਹੀਂ ਬਿਲਦੇ ਕੁੜਿਆਲੇ ਦੇ ਜਿਹੜੇ ਆਪੇ ਜੋੜੀ ਵਿਛੋੜੀਆਂ ਆਪੇ ਕੁਦਰਤ ਦੇ ਦਿਖਾਏ ਮੋਹ ਸੋਗ ਵਿਯੋਗ ਹੈ ਪੁਰਬ ਲਿਖਿਆ ਕਮਾਈ ਜਿਹੜਾ ਜੀਵ ਹੈ ਆਪਣੇ ਆਪ ਨੂੰ ਆਪੇ ਜੋੜਦਾ ਆਪੇ ਵਿਛੋੜਦਾ ਆਪੇ ਕੁਦਰਤ ਦੇ ਇਹ ਦਿਖਾਏ ਆਪੇ ਕੁਦਰਤ ਤੋਂ ਦੇ ਦੇਂਦੀ ਹੈ ਉਹਨੂੰ ਕੁਦਰਤ ਦਾ ਹੁਕਮ ਨਾਲ ਦਿਖਾਈ ਦਿੰਦੀ ਹੈ ਉਪਦੇਸ਼ ਨਾਲ ਦਿਖਾਈ ਦਿੰਦੀ ਹੈ ਪਰ ਜੋੜ ਵਿਛੋੜ ਵੀ ਜਦ ਕਰਦਾ ਵਿਛੋੜਤਾ ਹੋਇਆ ਹੋਇਆ ਹੀ ਹੈ ਜੁੜਦਾ ਜ਼ਿਆਦਾ ਹੈ ਜਦ ਉਹਨੂੰ ਉਪਦੇਸ਼ ਕਰੀਂ ਜੁੜਦਾ ਆਪ ਹੈ ਉਪਦੇਸ਼ ਚਾਹੇ ਵੀ ਕਰਦਾ ਉਹ ਸੁਣ ਕੇ ਗੱਲ ਜੁੜ ਝਕਦਾ ਜੇ ਜੁੜਨਾ ਹੋਵੇ ਆਪੇ ਜੋੜ ਵਿਛੋੜੀ ਹੈ ਜਿਹੜੇ ਵਿਛੜਿਆ ਹੋਇਆ ਹੈ ਵਿਛੋੜਾ ਹੋਇਆ ਹੋਇਆ ਹੈ ਉਹ ਆਪੇ ਜੁੜਦਾ ਜੀ ਨਾ ਜੁੜਦੇ ਆਪੇ ਕੁਦਰਤ ਦੇ ਦਿਖਾਏ ਫਿਰ ਉਹ ਕੁਦਰਤ ਆਪੇ ਦੇ ਜਾਂਦੀ ਹੈ ਤੇ ਜੁੜ ਜਾਂਦਾ ਹੈ ਕੁਦਰਤ ਉਦੋਂ ਸਾਰਾ ਚਾਨਣ ਹੋ ਜਾਂਦਾ ਕੁਦਰਤ ਵਾਰੇ ਚਾਨਣ ਉਦੋਂ ਹੋਇਆ ਜਾਂਦਾ ਉਹ ਸੋਗ ਵਿਯੋਗ ਹੈ ਜਿਹੜਾ ਉਹ ਹੈ ਨਾ ਫਰੀਦ ਦਾ ਇਹ ਸੋਗ ਹੈ ਇਹ ਹੀ ਹੈ ਵਿਯੋਗ ਗਵਨ ਸਰੀਰ ਦਾ ਜਿਹੜਾ ਜੋਗ ਹੈ ਉਹ ਆਪਣੇ ਮੂਲ ਨੂੰ ਵਿਯੋਗ ਹੈ। ਬਾਹਾਂ ਦਾ ਜੋਗ ਹੈ ਆਪਣੇ ਮੂਲ ਨੂੰ ਵਿਯੋਗ ਹੈ। ਉਹ ਬਾਹਾਂ ਨਾਲ ਜੋੜਦਾ। ਜੋਗ ਵੀ ਹੈ ਤੇ ਉਹ ਤੇ ਵਿਯੋਗ ਵੀ ਹੈ ਆਪਣੇ ਮੂਲ ਨਾਲ ਵਿਯੋਗ ਹੈ ਤੇ। ਹੈ। ਪੂਰਵ ਲਿਖਿਆ ਕਮਾਈ। ਪੂਰਵ ਲਿਖਿਆ ਹੋਇਆ ਕਮੂਲ ਹੈ। ਕਰਮ ਤੇ ਜੁੜ ਜਾਉਗੇ ਆਸੀਂ। ਕਰਮ ਦੇ ਨਾਲ ਜੁੜ ਕੇ ਆਇਆ ਸੀ ਉਹੀ ਕਮਾਈ ਚਲੀ ਜਾਂਦਾ। ਉਹੀ ਭਾਰਟ ਹੋਈ ਜਾਂਦਾ। ਠੀਕ ਹਾਂ ਬਲੇਹਾਰੀ ਤਿੰਨ ਕੋ ਜੋ ਹਰ ਚਰਣੀ ਰਹੇ ਲਿਵ ਲਾਏ ਜਿਉਂ ਜਲ ਮਹਿ ਕਮਲ ਲਿਪਤ ਹੈ ਐਸੀ ਬਣਤ ਬਣਾਈ ਵੇ ਉਹਨਾਂ ਦੇ ਬਲੇਹਾਰੀਆਂ ਕੁਰਬਾਨ ਨੇ ਜਿਹੜੇ ਹਰ ਚਲਨ ਦੇ ਲੜਕੇ ਤਲਾਕੇ ਰਹਿੰਦੇ ਨੇ ਜਿਉਂ ਜਲ ਮਹਿ ਕਮਲ ਲਿਪਤ ਜਿਵੇਂ ਜਲ ਦੇ ਵਿੱਚ ਕਮਲ ਹੁੰਦਾ ਪਰ ਕਮਲ ਪਾਣੀ ਨਾਲ ਜੁੜਿਆ ਨਹੀਂ ਹੁੰਦਾ ਅਲੱਗ ਹੁੰਦਾ ਲਿਪਤ ਰਹਿੰਦਾ ਉਹਨਾਂ ਦੀ ਐਸੀ ਬਣਤ ਰੁੱਦੀ ਆ ਮਾਇਆ ਵਿੱਚ ਉਹ ਦਸ ਰਹਿੰਦੇ ਨੇ ਸਰੀਰ ਤੇ ਰਹਿੰਦੇ ਹੋਏ ਵੀ ਸਰੀਰ ਦਾ ਇੰਨੇ ਕਾ ਜੁੜੇ ਨੇ ਜਿਵੇਂ ਪਾਣੀ ਨਾਲ ਜੁੜਿਆ ਹੋਇਆ ਹੈ। ਅਲੱਗ ਤਰ੍ਹਾਂ ਨੇ। ਸੇ ਸੁਖੀਏ ਸਦਾ ਸੋਹਣੇ ਜਿਨ੍ਹਾਂ ਵਿੱਚੋਂ ਆਪ ਗਵਾਏ ਤិន ਸੋਗ ਵਿਜੋਗ ਕਰੇ ਨਹੀਂ ਜੋ ਅੰਕ ਸਮਾਏ। ਸੇ ਸੁਖੀਏ ਸਦਾ ਸੋਹਣੇ ਉਹ ਸੁਖੀਏ ਨੇ ਸਦਾ ਹੀ ਸੋਹਣੇ ਨੇ ਜਿਨ੍ਹਾਂ ਵਿੱਚੋਂ ਆਪ ਗਵਾਏ ਜਿੰਨਾਂ ਦੇ ਵਿੱਚੋਂ ਆਪਣਾ ਭਾਵ ਜਿਨ੍ਹਾਂ ਨੇ ਆਪਣੀ ਵਰਗੀ ਤਿਆਗੀ ਆਪਣੇ ਅੰਦਰੋਂ। ਉਹ ਸੁਖੀਏ ਨੇ ਉਹੀ ਸੋਹਣੇ ਨੇ ਤិន ਸੋਗ ਵਿਜੋਗ ਕਦੇ ਨਾ ਯੋਗ ਨੂੰ ਨਾ ਕਦੇ ਸ਼ੋਗ ਹੈ ਨਾ ਕਦੇ ਵਿਜੋਗ ਹੈ ਜੋ ਹਰ ਕੈ ਸੁਖ ਸੁਭਾਏ ਉਹ ਹਰ ਦੇ ਨਾਲ ਹੈ ਆਪਣੇ ਮੂਲ ਦੇ ਨਾਲ ਜੁੜ ਗਏ ਉਹਦੇ ਅੰਗ ਬਣ ਗਏ ਅੰਗ ਸਮਾਇ ਦਾ ਭਾਵ ਹੈ ਜੀ ਉਹਦੇ ਸਰੀਰ ਦਾ ਹੀ ਹਿੱਸਾ ਬਣ ਗਏ ਅੰਗ ਦੇ ਬਣ ਕੇ ਸਮਝੋ ਬਿਲਕੁਲ ਜੀ ਠੀਕ ਹੈ ਜੀ ਇੱਥੇ 7ਵੀਂ ਪੌੜੀ ਸਮਾਪਤੀ ਹੈ ਜੀ